ਸ਼ਲੋਕ ਮਹੱਲਾ ਚੌਥਾ ਮੈਂ ਮਨ ਤਨ ਖੋਜ ਖੋਜਦਿਆਂ ਸੋ ਪ੍ਰਭ ਲੱਦਾ ਲੋਕ ਵਾਗ ਅਰਤਾਨ ਤਰ ਕਿਹੜਾ ਥਾਂ ਵਾਹਲਾ ਆਈ ਲੈ ਵਾਹਲਾ ਕਹਣਾ ਇਹ ਜੋ ਮਨ ਖੋਜਿਆ ਮਨ ਜੋ ਹੂਜਿਆ ਜਾ ਜਿਹੜੀ ਜੋਤ ਹੈ ਜੋਤ ਕੌਣ ਬਾਲੇ ਵਾਰ ਮੈਂ ਲਾਪੇ ਅਰ ਜੋ ਤੇਰੀ ਕੁੜੀ ਕੋਈ ਹੋਰ ਐ ਉਹ ਤੇਰੀ ਕੁੜੀ ਦਾ ਤੂੰ ਕੇ ਹੀ ਜਾਂਦਾ ਜਦੋਂ ਕੋਈ ਜਾਂਦਾ ਤੇਰੀ ਕੁੜੀ ਛੱਡ ਜੱਦੀ ਐ ਹਾਰਡ ਚੱਲਦਾ ਰਹਿੰਦਾ ਹਾਰਡ ਦੇ ਨਾਲ ਸਬੰਧਾ ਉਹਦਾ ਤੇਰੀ ਕੁੜੀ ਸਮਾਹ ਨਾਲ ਸਮਾਹ ਨਾਲ ਰਹੀਦਾ ਉਹਦਾ ਹਾਂ ਚਤਗੁਰ ਜਾਗਦਾ ਤੇ ਉਹ ਹਾਰਡ ਨਾਲ ਸਬੰਧਾ ਜਗਦਾ ਨਾ ਹਾੜੀ ਚੱਲ ਸਕਦਾ ਸਾਹ ਨਹੀਂ ਆ ਸਕਦਾ ਹਾਂ ਜੀ ਮੈਂ ਮਨ ਤਨ ਖੋਜ ਖੋਜਦੇ ਆ ਸੋ ਪ੍ਰਭ ਲੱਗਾ ਲੋੜ ਬਨ ਤਨ ਖੋਜਦੇ ਦੇ ਵਿੱਚੋਂ ਬਨ ਖੋਜੇ ਮਨ ਚੋਂ ਜੀ ਵਿਸ਼ਟ ਗੁਰੂ ਮੈਂ ਪਾਇਆ ਜਿਨ ਹਰ ਪ੍ਰਭ ਦਿੱਤਾ ਜੋੜ ਉਹ ਫਿਰ ਵਿਸ਼ਟ ਗੁਰੂ ਪਾਤਾ ਫਿਰ ਉੱਥੋਂ ਅੰਦਰੋਂ ਫਿਰ ਉਹ ਸ਼ਬਦ ਗੁਰੂ ਪ੍ਰਗਟ ਹੋਇਆ ਉੱਥੋਂ ਆਇਆ ਜਿੱਥੇ ਮਾਨੂੰ ਸੁਧ ਹੋ ਕੇ ਸੁਬਾਹ ਦੀ ਡਿੱਗ ਗਿਆ ਸੁਬਾਹ ਦੀ ਡਿੱਗ ਰੂਪੇ ਨਾ ਸੁਣਦੇ ਵਿੱਚ ਜਦ ਮਾਨ ਬੈ ਟਿਕ ਬੈ ਜੀ ਅਗਾਂਹ ਸੁਬਾਹ ਦੀ ਡਿੱਗ ਮੈਂ ਟਾਦੀ ਬਣਾ ਦਿੰਦੇ ਸੀ ਹੈ ਹੂੰ ਹੂੰ ਉਹਨਕ ਪ੍ਰਤੀਕਾ ਟਾਦੀ ਸੁਬਾਹ ਵੀ ਜਦ ਆ ਖੜੀ ਆ ਉਹਨੂੰ ਹੋ ਜਾਂਦਾ ਟਿਕ ਜਾਂਦਾ ਸਮਝੋ ਹਰ ਕੋਸ਼ਿਸ਼ ਕੋਸ਼ਿਸ਼ ਕੀਤੀ ਇੱਥੇ ਜਰੂਰ ਵੀ ਪਤਾ ਕੁਝ ਨਹੀਂ ਹੁੰਦਾ ਸਾਰਿਆਂ ਨੂੰ ਪਤਾ ਹੈ ਕੱਲ ਦੀ ਕੀਤੀ ਸੀ ਗੁਰੂ ਆਪੇ ਦੂਏ ਪਾਸੇ ਲੁਣਾ ਜੀ ਕੇ ਉਹ ਕਾਹ ਅਗਲੀ ਦੀ ਗੱਲ ਹੈ ਹਾਂਜੀ ਹਾਂਜੀ ਜੀ ਬੇਸਟ ਗੁਰੂ ਮੈਂ ਪਾਇਆ ਵਿਸ਼ੇਸ਼ ਅਜਾ ਵਿਸ਼ੇਸ਼ ਗੁਰੂ ਮੈਂ ਪਾਇਆ ਫਿਰ ਇਸ ਤਰ੍ਹਾਂ ਕਿਉਂ ਲਿਖਿਆ ਜਿਨਿ ਹਰ ਪ੍ਰਭ ਦਿੱਤਾ ਜੋੜ ਜਿਨ ਹਰ ਰਬਾਨੀ ਉਰਤੋਂ ਗਿਆਨ ਪਾਇਆ ਠੀਕ ਹੈ ਹਰ ਪ੍ਰਭ ਪਰਮੇਸ਼ਰ ਹੈ ਇੱਥੇ ਫਿਰ ਹਾਂ ਹਾਂ ਗਿਆਨ ਬਾ ਗਿਆਨ ਕਿੱਥੇ ਇਕੋ ਇਤੇ ਵਿਆਕਰਣ ਦੀ ਰਗ ਨਹੀਂ ਵਿਆਕਰਣ ਨਾਲ ਗੀ ਕਿੱਥੇ ਗੁਰੂ ਦਾ ਅਰਥ ਗਿਆਨ ਲੱਗਣਾ ਹੈ ਕਿੱਥੇ ਗੁਰੂ ਦਾ ਅਰਥ ਸ਼ਬਦ ਗੁਰੂ ਲੱਗਣਾ ਇਹ ਵਿਸ਼ਾ ਹੈਗਾ ਇੱਕ ਸੱਤ ਧਾਰਾ ਚਾਹੀਦਾ ਵਿਚਾਰ ਧਾਰਾ ਸਾਰਾ ਤੋਂ ਅਸੀਂ ਬਾਤ ਜੀ ਜਾ ਸਕਦੇ ਠੀਕ ਹੈ ਹਾਂ ਜਿੰਨਾ ਜਿਹੜਾ ਧਾਰਾ ਦਾ ਪਤਾ ਨਹੀਂ ਹੈਗਾ ਉਹਦਾ ਉਹ ਝਗੜਾ ਕਿਉਂ ਇੱਥੇ ਗੁਰੂ ਦਾ ਅਰਥ ਗਿਆਨ ਕਿਉਂ ਕੀਤਾ ਇੱਥੇ ਅਰਥ ਕਿਉਂ ਕੀਤਾ ਉਹ ਕਿਉਂਦਾ ਜਵਾਬ ਉਹ ਦਿਖੇਗਾ ਇਹ ਕੋਈ ਦਾ ਵਿਸ਼ੇ ਠੀਕ ਹੈ ਤੇ ਇਹ ਬੁੱਝ ਦਾ ਵਿਸ਼ੇ ਇਹ ਇੱਥੇ ਆਈ ਹਾਂ ਤੇ ਆਉਂ ਤੇ ਇਹਦਾ ਸਿੱਧਾ ਰਸ ਟੋਲਟ ਕਰੇ ਜਾਵਾਂਗੇ ਪਰ ਇੱਥੇ ਆਪਣਾ ਡਿਲੀਟ ਲੈ ਜੂਗੀ ਪਾਇਆ ਵਿਸ਼ੇਸ਼ ਅੱਛਾ ਜੀ ਓਹੋ ਇਹਦਾ ਗੁਰੂ ਬਹੁਤ ਅੱਛਾ ਉਹ ਆ ਵਿਸ਼ੇਸ਼ ਗੁਰੂ ਹੈ ਗਿਆਨ ਉਹ ਗਿਆਨ ਗੁਰੂ ਆਤਮਾ ਉਪਦੇਸ਼ ਠੀਕ ਹੈ ਆਤਮਾ ਉਪਦੇਸ਼ ਹੈ ਗੁਰਬਾਣੀ ਇਹਦੇ ਜਿਹੜਾ ਗਿਆਨ ਹੈ ਇਹ ਵਿਸ਼ੇਸ਼ ਗਿਆਨ ਪਾਇਆ ਪਰ ਇਹ ਬਣੀ ਸਮਝਉਂਦੀ ਪੜਦੇ ਆ ਬਾਣੀ ਅਰਥ ਕਰਦੇ ਆ ਠੀਕ ਹੈ ਕੀਤੇ ਜੋ ਪਾਇਆ ਲੋਕ ਪੜਦੇ ਨੇ ਠੀਕ ਹੈ ਫਰਾਂ ਕੋ ਮਸਾਂ ਆ ਗਈ ਲੋਕਾਂ ਨੂੰ ਸਮਝ ਆ ਗਈ ਮਹੱਲਾ ਤੀਜਾ ਮਾਇਆ ਧਾਰੀ ਅੰਨਾ ਬੋਲਾ ਸ਼ਬਦ ਨਾ ਸੁਣੇ ਹੀ ਬੋ ਰੋਲ ਕਚੋਲ ਕੋਈ ਮਾਇਆ ਧਰੀ ਹੁਣ ਇਹਦਾ ਅਸਰ ਕਰਦੂ ਜਿਹਦੇ ਕੋਲ ਬਹੁਤਾ ਪੈਸਾ ਹੈ ਮਾਇਆ ਧਰੀ ਹੋਦੀ ਹੈ ਜਿਹੜਾ ਸਰੀਰ ਮਾਇਆ ਦਾ ਪੰਜ ਤੱਤਾਂ ਦਾ ਹੈ ਜਿਹਦੇ ਇਹ ਆਪਣੇ ਆਪ ਨੂੰ ਗਏ ਕਹਿੰਦਾ ਮਾਇਆ ਧਰੀ ਵਾਏ ਉਹਦੇ ਉੱਤੇ ਜੇ ਆਪਾਂ ਸ਼ਬਦ ਤੋੜੀਏ ਤਾਂ ਮਾਇਆ ਆਧਾਰੀ ਬਣ ਜਾਂਦਾ ਹੈ ਨੇੜਾ ਮਾਇਆ ਦੇ ਆਸਰੇ ਖੜਾ ਹੈ ਹਾਂਜੀ ਆ ਨਾਲ ਜੁੜਿਆ ਹੋਇਆ ਠੀਕ ਹੈ ਜੀ ਠੀਕ ਹੈ ਜੀ ਮਾਇਆ ਆਧਾਰੀ ਅਤ ਅੰਨਾ ਸ਼ਬਦ ਬੋਲਾ ਹਾਂਜੀ ਠੀਕ ਆ ਆਪਾਂ ਵਿਦਵਾਨਾਂ ਨੇ ਕੀਤੇ ਦੇ ਤੇ ਕਿੰਨੇ ਵਿੱਚ ਜਿਹਨਾਂ ਖਾਤਰ ਹੋੜਬੀ ਰੋ ਫਿਰਦੇ ਦੇ ਕਿਛ ਦੇ ਹਿਸਾਬ ਨਾਲ ਉਹ ਨਾ ਬੋਲੇ ਗੱਲ ਹੈ ਸਰ ਕਿਹਾ ਸੀਗਾ ਚਲੋ ਆਜ਼ੂਰੀ ਉਹੀ ਸੁਣ ਹਗਰਾ ਸ਼ਬਦ ਅੰਦਰ ਉੱਤ ਆਤਮਾ ਦੀ ਆਵਾਜ਼ ਹੀ ਸੁਣ ਹਗਦਾ ਉਹ ਕਿਵੇਂ ਸੁਣੂਗਾ ਉਹ ਤਾਂ ਬਾਹਲੇ ਉਹ ਤਾਂ ਬਾਹਰ ਪੁੱਟੀ ਬੈਠਾ ਹੈ ਆਕਾਸ਼ ਮਾੜੀ ਉਹਨਾਂ ਦੀ ਆਕਾਸ਼vani ਬਾਹਰ ਹੈ ਸਾਡੇ ਆਕਾਸ਼vani ਗੁਰਮੁਖੀ ਅੰਦਰ ਹੈ ਬਿਨਾਂ ਕਰਨਾ ਦੇ ਸੁਣਨ ਵਾਲੀ ਹੈ ਸਾਡੀ ਉਹਨਾਂ ਦੀ ਕਰਨਾ ਸੁਣਨ ਵਾਲੀ ਹੈ ਸਰੀਰ ਚੋਂ ਸੁਣਦੇ ਨੇ ਤੇਰ ਕੁੜੀ ਚੋਂ ਉਹ ਤੇਰ ਨੂੰ ਕਹਾਂ ਕੇ ਦੱਸ ਉਹ ਅਸਿਰ ਦੇ ਮਾਇਆ ਦਾ ਰੇਤ ਰੁਕੜੀ ਨੂੰ ਦਸੂਦਾਰ ਬੰਦੇ ਨੇ ਫਿਰ ਗੁੜੀ ਸਾਨੂੰ ਮਾਇਆ ਨਾਲ ਜੋੜਦੀ ਹੈ ਜਿਹੜਾ ਹਿਰਦਾ ਉੱਥੇ ਉਹ ਆਵੜ ਕੇ ਜੇ ਉਹ ਬਸ ਰੁਕੜੀ ਤੋਂ ਸੁਣਨਾ ਚਾਹੁੰਦੇ ਆ ਉੱਥੇ ਬਹੁਤ ਰੋਲਾ ਤੇ ਘਿਚੋੜਾ ਹੈ ਜੀ ਉੱਥੇ ਦਾ ਰੋਲ ਘਿਚੋੜਾ ਹੈ ਰੋਲ ਘਿਚੋੜੀ ਦੀ ਗੱਲ ਪੈਗੀ ਕੋਈ ਪਾਣੀ ਦੀ ਗੱਲ ਰੋਲ ਘਿਚੋੜੇ ਤਾਂ ਬਾਪ ਬਾਹਰ ਹੈ ਬਾਹ ਬਾਹਰ ਬਣਾ ਲਈ ਟੀਨਾ ਕੋਤ ਬਾਹਰ ਬਣਾ ਲੇ ਸਭ ਕੁਝ ਮਾਇਆ ਦੇ ਉਮਰਤ ਬਾਹਰ ਬਣਾ ਲੇ ਛੱਤੀ ਉਮਰਤ ਬਾਹਰ ਠੀਕ ਹੈ ਜੀ ਸਭ ਕੁਝ ਬਾਹਰ ਬਣਾ ਗੁਰੂ ਬਾਹਰ ਬਣਾ ਲਿਆ ਭਗਤੀਆਂ ਦੇ ਇੱਕ ਪ੍ਰਕਾਰ ਦੀ ਬਣਾਲੀ ਰੋਸ ਚ ਹੋ ਰਹਿ ਗਿਆ ਆਪਣੀ ਆਪਣੀ ਮੱਤ ਆਪਣੀ ਆਪਣੀ ਬੁੱਧ ਬੁੱਧੀ ਰੋਗ ਵਿਚਾਰਾ ਜਿਵੇਂ ਸੁਖੀ ਕਰੇ ਸੌਣ ਵਾਲਾ ਹਕੀਕਤ ਰੋਗ ਜੋ ਲੱਭਾਇਆ ਹੋਇਆ ਮਾਇਆ ਧਾਰੀਆਂ ਦਾ ਮਾਇਆ ਧਾਰੀਆਂ ਤੇ ਬੱਤਾ ਸਾਗਤਾ ਦੀ ਬੱਤਾ ਦੇ ਗੁਰਮੁਖੀ ਜਾਪੈ ਸ਼ਬਦ ਲਿਵ ਲਾਏ ਜਿਹੜੇ ਗੁਰਮੁਖ ਨੇ ਉਹਨਾਂ ਦਿਖ ਜਾਂਦਾ ਅੱਛਾ ਉਹੋ ਚੜ੍ਹਨ ਦੇ ਜਪਣਾ ਕੋਈ ਨਹੀਂ ਹੁੰਦਾ ਸਭ ਲੈਣਾ ਪੁੱਝ ਲੈਣਾ ਉਹਨਾਂ ਦੀ ਸ਼ਬਦਾਂ ਨਾਲ ਲੱਗਦੀ ਫਿਰ ਉਹ ਗੁਰਬਾਣੀ ਨਾਲ ਹੋਰ ਤਰੀਕੇ ਨਾਲ ਜੁੜਦੇ ਨੇ ਉਹ ਗਹਿਰਾਈ 'ਚ ਉਤਰ ਜਾਂਦੇ ਨੇ ਗੁਰਬਾਣੀ 'ਚ ਜਿਹੜਾ ਗੁਰਬਾਣੀ ਦੇ ਸ਼ਬਦ ਨਾਲ ਗਹਿਰਾਈ 'ਚ ਉਤਰ ਗਿਆ ਉਹ ਜਾ ਕੇ ਉਹ ਸਮਝ ਕੇ ਤਾਂ ਆਪਣੇ ਅੰਦਰ ਉਹਦਾ ਸ਼ਬਦ ਪ੍ਰਗਟ ਹੁੰਦਾ ਹਾਂਜੀ ਗੁਰਮੁਖੀ ਜਾਪੈ ਸ਼ਬਦੀ ਲਿਵ ਲਾਏ ਹਰ ਨਾਮ ਸਾਰਾ ਗੁਰਮੁਖ ਨੂੰ ਪੈਣਾ ਗੁਰਮੁਖ ਨੂੰ ਸਮਝ ਆਈਏ ਗੁਰਬਾਣੀ ਚੋਂ ਠੀਕ ਹੈ ਤਾਂ ਕਿਤੇ ਸ਼ਬਦਾਂ ਨਾਲ ਲੱਗੀ ਆਉਦੀ ਮੰਨੇ ਪਹਿਲਾਂ ਗੁਰਬਾਣੀ ਦੇ ਹਰ ਨਾਮ ਨੂੰ ਸਮਾਇਆ ਹੋਇਆ ਇਹਨੂੰ ਗੁਰਬਾਣੀ ਨੂੰ ਬੰਦੇ ਤਾਂ ਜੇ ਜਾ ਕੇ ਸੁਭਾਵੇ ਜੋ ਤਿਸ ਭਾਵ ਕੋ ਕਰੇ ਕਰਾਇਆ ਨਾਨਕ ਵੱਜਦਾ ਜੰਤ ਵਜਾਇਆ ਗੁਰਬਖਸ਼ ਦੀ ਗੱਲ ਚੱਲ ਰਹੀ ਹੈ ਸੈਕੰਡ ਪਰਸਨ ਕੋਲ ਉਹ ਦਿੱਕਾ ਹੋਇਆ ਠੀਕ ਹੈ ਤੁਸੀਂ ਤੁਸੀਂ थर्ड ਪਰਸਨ ਹੋ ਗਿਆ ਦੂਰ ਹੋ ਗਿਆ ਪਰਮੇਸ਼ਰ ਨੂੰ ਜੋ ਉਹਦਾ ਕਰਾਇਆ ਇਹ ਗੁਰਮੁਖ ਕਰ ਠੀਕ ਹੈ ਉਹ ਸਰੀਰ ਵਈਤਾ ਤੁਸੀਂ ਇਹ ਨਹੀਂ 몰ਤੀ ਰਖ ਲਈ ਉਹ ਸਰੀਰ ਆਪ ਨਹੀਂ ਬੋਲਦਾ ਇਹ ਤਾਂ ਜਾਣਦਾ ਇਹ ਤਾਂ ਵਜਾਇਆ ਵਜਰਾ ਤੂੰ ਨਹੀਂ বাজਾਈ ਵਜਦੀ ਨਹੀਂ ਬਜਿਆ ਵੀ ਇਹੀ ਹਾਲ ਸਰੀਰ ਆਪ ਨਹੀਂ ਬੋਲਦਾ ਅੱਖਾਂ ਨਹੀਂ ਦੇਖਦੀ ਦੇਖਣ ਵਾਲਾ ਕੋਈ ਹੋਰ ਹੈ ਕੰਨ ਸੁਣਦੇ ਸੁਣਨ ਵਾਲਾ ਕੋਈ ਹੋਰ ਹੈ ਜੀਵ ਨਹੀਂ ਖੱਟਾ ਵੱਖਾ ਦਸ ਜੀ ਉੱਪਰ ਕੋਈ ਹੋਰ ਕਰਦਾ ਸੋ ਜੀ। ਸੌੜੀ ਤੂੰ ਕਰਤਾ ਸਭ ਕੁਝ ਜਾਣਦਾ ਜੋ ਜੀਆ ਅੰਦਰ ਵਰਤੈ ਤੂੰ ਕਰਤਾ ਆਪ ਗਣਤ ਹੈ ਸਭ ਜਗ ਵਿੱਚ ਗਣਤ ਹੈ। ਤੂੰ ਕਰਤਾ ਜਿਹਨੇ ਸਾਰੀ ਸ੍ਰਿਸ਼ਟੀ ਬਣਾਈ ਤੂੰ ਤਾਂ ਸਾਰਾ ਕੁਝ ਜਾਣਦਾ ਹੀ ਸਾਡੇ ਅੰਦਰ ਜੋ ਕੁਝ ਵਰਤਦਾ ਤੇ ਤੂੰ ਹੋਇਆ ਉਹ ਵੇਖੇ ਅਦਲ ਚਲੋ ਸਾਰਾ ਨਹੀਂ ਦੀ ਤਾਂ ਤਾਂ ਦੇਖਦਾ ਆ ਦੇਖੋ ਅੱਖਰੀ ਹੈ ਉਹ ਅੱਖ ਨੂੰ ਰੋਗ ਲੱਗਿਆ ਸਾਡੇ ਅੱਖੀ ਸੂਤਕ ਵੇਖਾਂ ਕਾਹਦੀ ਸੂਤਕ ਲੱਗਿਆ ਆ ਕੀ ਸੂਤਕ ਜੋ ਜੀ ਅੰਦਰ ਵਸ ਜੋ ਅਸੀਂ ਸੋਚਦੇ ਹਾਂ ਨਾ ਵੀ ਜਾਣਦਾ ਹੈ ਅੱਲਾ ਤੇ ਵੀ ਜਾਣਦਾ ਤੂੰ ਕਰਤਾ ਆਪ ਗਣਤ ਹੈ ਸਭ ਜਗ ਵਿੱਚ ਗਣਤ ਹੈ ਜਿਹੜਾ ਕਰਤਾ ਉਹ ਗਿਰਤੀ ਤੋਂ ਪਰੇ ਹੈ ਸਿੱਧ ਸਾਰੀ ਜੀਵਨ ਵਿੱਚ ਕਰਤੇ ਦੀ ਵਿਰਤੀ ਨਹੀਂ ਹੁੰਦੀ ਸੱਚ ਕਰਾਂ ਕਿ ਕਿੰਨੇ ਕਿੰਨੇ ਆਤਮਾਵਾਂ ਨਾਲ ਗਿਲਦੀ ਸੰਸਾਰ ਸਦੀ ਜਾਂ ਸਾਰੀ ਜੀਵਾਂ ਦੀ ਹੁੰਦੀ ਹੈ ਉਹ ਗਣਤ ਹੈ ਗਿਰਤੀ ਤੋਂ ਕਰਤਾ ਠੀਕ ਹੈ ਅਗਲਾ ਤੂੰ ਕਰਤਾ ਆਪ ਗਣਤ ਹੈ ਭਾਵਤੀ ਬਣਿਆ ਜੀ ਜਿਹੜਾ ਕਰਤਾ ਹੈ ਉਹ ਗਿਰਦੀ ਚ ਨਹੀਂ ਹੁੰਦਾ ਅੱਛਾ ਜੀ ਕਰਤਾ 1 ਕਰਤਾ 1 2 ਬਹੁਤ ਹੈ ਨਹੀਂ ਲਗੇ আচ্ছা ਜੀ ਗਿਣਤੀ ਹੁੰਦੀ ਹੈ 1 2 3 4 5 6 7 8 ਗਿਣਤੀ ਹੋ ਗਈ ਜਾਣਾ ਗਿਣਤੀ ਠੀਕ ਹੈ ਜੀ ਗਿਣਤੀ ਦਾ ਜੇ 2 ਨਾਲ ਕੋਈ ਇੱਕ ਤੋਂ ਗਿਣਤੀ ਸ਼ੁਰੂ ਹੁੰਦੀ ਹੈ ਜੀ ਕਿਤੇ ਇਸ ਕਰਕੇ ਸੱਚਖਾਨ ਦੇ ਵਿੱਚ ਇੱਕੋ ਹੀ ਹੈਗਾ ਗਿਣਤੀ ਨਹੀਂ ਹੁੰਦੀ ਹਾਂ ਹਾਂ ਆ ਜਗ ਨਹੀਂ ਗਿਣਤੀ ਹੁੰਦੀ ਹੈ ਕਿ ਇੱਥੇ ਜੀ ਯਾਤਰਾ ਦਾ ਕੇ ਨਾਮ ਜਤਾਂ ਵਖਰੀਆਂ ਵਖਰੀਆਂ ਤੇਰੀ ਬਣਤਾ ਤੇਰਾ ਕੀਤਾ ਸਭ ਤੇਰਾ ਕੀਤਾ ਸੰਸਾਰ ਤੇ ਵਰਤਦਾ ਹੈ ਤਾਂ ਸੰਸਾਰ ਬਣਾਇਆ ਸੰਸਾਰ ਤੇਰੀ ਹੈ ਸਾਹ ਵੱਲ ਤੋਂ ਬਣਾਈਐ ਸੰਸਾਰ ਦੀ ਜੋ ਤਾਂ ਕੀ ਤੋਹੀ ਵਰਤਰੇ ਜੁਤੀ ਕੌਣ ਹੈ ਉਹ ਹੀ ਵਰਤਰੇ ਹੈ ਠੀਕ ਹੈ ਸੰਸਾਰ ਵਿੱਚ ਸੋ ਘਟ ਵੀ ਸੱਚਾ ਹੋ ਕੇ ਵਰਤਦਾ ਹੈ 'ਚ ਉਹ ਵੀ ਕੋਈ ਆਰੂਪ ਸਾਰਿਆਂ ਦੇ ਵਿੱਚ ਸੱਚੇ ਦਾ ਰੂਪ ਹੈ ਕਾ ਦਾ ਰੂਪ ਹੈ ਕੂੜਿਆਰਿਆਂ ਦੇ ਰੂਪ ਖਰੇ ਖਰੇ ਦੇ ਮਨ ਵਖਰੇ ਵਖਰੇ ਦੇ ਉਵਖਰੀਆ ਮਨ ਪਉਦਾ ਕਿਤਨੀ ਬੋਝਾ ਠੀਕ ਹੈ ਹਾਂ ਉਵਖਰੀਆ ਬਣ ਕਰਕੇ ਜਿਤ ਕਰਕੇ ਨਹੀਂ ਹੈ ਠੀਕ ਹੈ ਤਾਂ ਦਾ ਸੱਚ ਸਾਹਿਬ ਚਲਦਾ ਹੈ ਇਹ ਤੇਰਾ ਖੇਲ ਹੈ ਜੀ ਹਾਂ ਇਹ ਤਾਂ ਤੇਰਾ ਖੇਲ ਹੈ ਜੇ ਠੀਕ ਹੈ ਸੱਚ ਸਾਹਿਬ ਦਾ ਚਲਦਾ ਹੈ ਕਿਤਾ ਹੋਇਆ ਸਾਹ ਹਾਂ ਜੀ ਸਤ ਗੁਰ ਨੂੰ ਮਿਲੇ ਸਾਹੀ ਕਿਸੇ ਪਰ ਆ ਦੇਖੋ ਜਿਹੜੇ ਹਾਲ ਨੂੰ ਮਿਲਣਾ ਸਤਿਗੁਰੂ ਨੂੰ ਮਿਲਣਾ ਇੱਕੋ ਗੱਲ ਹੈ ਆਪਣੇ ਅਸਰਾਧਵਾ ਨੂੰ ਮਿਲਣਾ ਹਾਲ ਨੂੰ ਮਿਲਣਾ ਇੱਕੋ ਗੱਲ ਹੈ ਠੀਕ ਨੂੰ ਮਿਲਣਾ ਹਾਲ ਨੂੰ ਮਿਲਣਾ ਅਸਰਾਧਵਾ ਉਹ ਅਸਰਾਧਵਾ ਤਾਂ ਕਈ ਹੈ ਬਣਾਈ ਜਿਹੜੇ ਗੱਲ ਕਰਦੇ ਨੇ ਪੂਜਾ ਹਾਂਜੀ ਠੀਕ ਹੈ ਜੀ ਸਤਿਗੁਰੂ ਨੂੰ ਮਿਲਣੇ ਦੋ ਪੜਾਖਾਂ ਤੱਕ ਦੀ ਪੜਾਈ ਹੈ ਹਾਂਜੀ ਹਾਲ ਨੂੰ ਮਿਲ ਗਏ ਹਾਲ ਨੂੰ ਮਿਲ ਗਏ ਸਤਿਗੁਰੂ ਨੂੰ ਮਿਲ ਗਏ ਹਾਲ ਨੂੰ ਮਿਲ ਗਏ ਇੱਕੋ ਗੱਲ ਹੈ ਠੀਕ ਹੈ ਜੀ। ਨਾ ਹੀ ਕਿਸੇ ਪਰਤ ਤਹ। ਉਹ ਉਹ ਫਿਰ ਪਰਤਦਾ ਨਹੀਂ ਤੂ ਉਹ ਫਿਰ ਤਾਂ ਕਦੇ ਆਉਗਾ ਤੂ ਕਦੇ ਨਹੀਂ ਬਲੂਗਾ। ਉਹ ਮਾਇਆ ਚ ਪਰਤ ਕੇ ਨਹੀਂ ਫਿਰ ਆਉਂਦਾ। ਜੀ। ਜਿਹੜਾ ਸਤਗੁਰੂ ਨੂੰ ਮਿਲ ਗਿਆ ਹਿਰਦੇ ਜਾ ਕੇ ਆਉਂਦਾ ਉਹ। ਠੀਕ ਹੈ ਜੀ। ਜਦੋਂ ਅਸੀਂ ਜਦੋਂ ਜਿਹੜਾ ਮਰ ਗਿਆ ਨਹੀਂ ਆਉਂਦਾ। ਉਹ ਮਰ ਗਿਆ ਤਾਂ ਗੁਰਬਾਣੀ ਬਲਦੀ ਆਤਮਾ ਕਰਕੇ ਆਉਂਦਾ ਸਰੀਰ ਨਹੀਂ ਉਹ ਆਉਂਦਾ। ਰੂਪਦਿਓ ਦਾ ਦਵਾਰ